ਸ਼ਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਤੇ ਪ੍ਰਵਾਣ ਜਿਨ ਸਾਸ ਗਿਰਾਸਨਾ ਬੀਸਰੇ ਸੇ ਪੂਰੇ ਪੁਰਖ ਪ੍ਰਧਾਨ ਹਾਂ ਉਹ ਜਿਹੜੇ ਗੁਰਮਖ ਨੇ ਹਨ ਹਾਂਜੀ ਉਹਨਾਂ ਦਾ ਕੀ ਸੋਣਾ ਕੀ ਜਾਗਣਾ ਕਿਉਂਕਿ ਜਿਹੜਾ ਗੁਰਮਖ ਜਾਗਦਾ ਜਾਗਣਾ ਬਹੁ ਪ੍ਰਕਾਰ ਹੈ ਭੁੱਲ ਜਾਣਾ ਸੋਣਾ ਗੁਰੂ ਮੁਖੇੜੇ ਨੇ ਸੰਤਾਰ ਵੱਲੋਂ ਸੁੱਤੇ ਹੋਏ ਹੁੰਦੇ ਨੇ ਬਸ ਫਰਕ ਹੈ ਲਈ। ਸਤਿ ਸਾਰੀ ਜਿਹੜੀ ਥੋਣਾ ਜਗਣਾ ਹੀ ਰਹਿੰਦਾ। ਨੇ ਕਲਪਨਾ ਬੰਦ ਕਰ ਲਈ। ਸੁੱਤਾ ਹੋਇਆ ਇੱਕ ਹੁੰਦਾ। ਇਹ ਆਤਮਾ। ਜੇ ਜਦੋਂ ਅਧੂਤ ਹੈ ਸੋਚ ਜਦ ਸੋਚ ਆਪਣਾ ਤਾਂ ਸੋਚ ਸ਼ੁਰੂ ਹੁੰਦੀ ਸੋਚਣਾ ਜਿਹਨੂੰ ਕਰਦੇ ਆ। ਜਦ ਉਹ ਕਰਦੇ ਨੇ। ਸੁੱਤਾ ਹੋਇਆ ਸੋਝਦਾ ਹੈ ਕਿ ਕਿ ਹੁੰਦਾ। ਅਸੀਂ ਬੰਦੂ ਸੁਣ ਕਰਦੀ ਗੱਲ ਤਾਂ ਨਹੀਂ ਉਹਨਾਂ ਦੇ ਨਾਲ ਗੂਤੋ ਤਾਂ ਸਦਾ ਹੀ ਕਰਦੇ ਨੇ। ਅੱਜਾਂ ਦਾ ਸੋਣਾ ਜਗਣਾ ਤੋਂ ਦੇ ਦਾ ਤਾਂ ਇਹ ਹੈਗਾ ਸੋਣਾ ਜਗਣਾ ਹੁਣ ਹੈ। ਅਲਪਾ ਹਾਰ ਸੁਲਫਸੀਦ ਦਰ ਅਲਪਾ ਹਾਰ ਸੁਲਫਸੀਦ ਦਰ ਦੇ ਆਸ਼ਮਾਨ ਉਹ ਬਸ ਜਾਗ ਰਹੀ ਮੁੰਦੇਸ ਸੁੱਤੇ ਹੋਏ ਵੀ ਜਾਗਦੇ ਨੂੰ ਸੁੱਤੇ ਰਹੇ ਇਹ ਇੱਕ ਅਵਸਥਾ ਦੀ ਗੱਲ ਹੈ ਇਸ ਵੇਲੇ ਅਜਿਹੀ ਨਹੀਂ ਸਰਦਾ ਜਿਵੇਂ ਡਿੱਗ ਗਈ ਤੁਸੀਂ ਬੇਹੋਸ਼ੀ ਦੀ ਹਾਲਤ ਚਲੇ ਗੱਲ ਔਖੀ ਹੈ ਰਾਤੀ ਲਿਆ ਦੀ ਬਦਲੀ ਔਖੀ ਹੈ ਗੱਲ ਠੀਕ ਹੈ ਜੀ ਪਰ ਉਹ ਅਵਸਥਾ ਦੀ ਗੱਲ ਹੈ ਹਾਂ ਹਾਂ ਜੀ ਚਾਹ ਜਾਗਣਾ ਗੁਰਮੁਖ ਤੇ ਪਰਮਾਨ ਹਾਂ ਉਹ ਬਰਬਕੀ ਜਿਹੜੇ ਦਰਗਾਹ ਚ ਪਰਬਾਨ ਹੋ ਗਏ ਉਹਨਾਂ ਦਾ ਸੋਨਾ ਜਾਗਣਾ ਦੀ ਉੱਤਰਾ ਹੈ ਠੀਕ ਹੈ ਜੀ ਜਿਹੜਾ ਛਾਸ ਗਰਾਸ ਆਪਾਂ ਰੋਟੀ ਖਾਦਦੇ ਹਾਂ ਉਹਦੇ ਵਿੱਚ ਆਪਣਾ ਕੋਈ ਆ ਆਪਾਂ ਕੁਝ ਖਾਦੇ ਰੋਟੀ ਹੋਵੇ ਜਾਂ ਕੋਈ ਫਲ ਫਰੂਟ ਹੋਵੇ ਉਦੋਂ ਵੈਗਰੂ ਕਰ ਸਕਦੇ ਆਪਾਂ ਰਾਮ ਰਾਮ ਦੀ ਕਰ ਸਕਦੇ ਠੀਕ ਹੈ ਉਹ ਜਿਹੜੇ ਬੂਨਾ ਰਾਮ ਦੀ ਗੱਲ ਹੈ ਉਹ ਗਰਾਸ ਨਾਲੋਂ ਘੱਟੀ ਕਾਫ ਦੇ ਵਿੱਚ ਵੀ ਜਿਆਦਾ ਭਜਨਾ ਜਦ ਬਾਹਰ ਨੂੰ ਕੱਢਦੇ ਆਂ ਸਾਹ ਉਹਨਾਂ ਜਦ ਬੋਲ ਸਕਦੇ ਆ ਤੁਹਾਨੂੰ ਖਿੱਚਦੇ ਜੇ ਤਾਂ ਵੀ ਡ੍ਰੈਗ ਤਾਂ ਜਿਹੜਾ ਚਪੜਾ ਹੈ ਸਾਹ ਅਗਰਾਹ ਨੂੰ ਸੁਭਤ ਜੋੜਿਆ ਜਿਹੜੇ ਰਾਮ ਰਾਮ ਕਰਦੇ ਤੇ ਮੂੰਹ ਨਾਲ ਰੋਟੀ ਖਾਣ ਵੇਲੇ ਰਾਮ ਰਾਮ ਮੂੰਹ ਨਾਲ ਜਿਹੜਾ ਹੈਗਾ ਉਹ ਵੀ ਹੋ ਸਕਦਾ ਹਾਂ ਅੰਦਰ ਬੰਦ ਦਾ ਮੰਨਤੇ ਨਾਲ ਸੰਬੰਧਤ ਹੋ ਸਕਦਾ ਬੰਦ ਦੇ ਵਿੱਚ ਉਹ ਤੋਂ ਯਾਦੇ ਰਹਿ ਸਕਦੀ ਰਹੇ ਆਪਾਂ ਨੂੰ ਯਾਦ ਬਣੀ ਦੀ ਆਪਾਂ ਉਹਦੇ ਨਾਲ ਜੁੜੇ ਰਹੇ ਜੀ ਚੀਤ ਲਲ ਜੀ ਨਾਲ ਹੱਥ ਪਰ ਕਰ ਕਪਸਾ ਸਾਹਿਬ ਸਾਤਰ ਸੰਸਦ ਨੂੰ ਬਿਸਰੇ ਜੀ ਠੀਕ ਹੈ ਪੂਰੇ ਪੁਰਖ ਪ੍ਰਦਾਤ ਉਹ ਪੂਰੇ ਪੁਰਖ ਨੇ ਪ੍ਰਦਾਤ ਨੇ ਉਹ ਭਗਤ ਨੇ ਗੁਰਮਖੀ ਨੇ ਪੰਜ ਪ੍ਰਵਾਹਨ ਪੰਜ ਪ੍ਰਧਾਨ ਆਇਆ ਨਾ ਹਾਂਜੀ ਪੂਰੇ ਤਾਂ ਕਿ ਉਹ ਇੱਕ ਹੋਏ ਇੱਕ ਹੋਏ ਹੋਏ ਨੇ ਚਾਹੇ ਉਹ ਇੱਕ ਹੋਏ ਹੋਏ ਨੇ ਚਾਹੇ ਉਹ ਹੋਏ ਨੇ ਪੂਰਾ ਪੁਰਖ ਪੂਰਾ ਪੁਰਖ ਪੂਰਨਮ ਬ੍ਰਹਮਜੈ ਹੋ ਜਾਂਦਾ ਪੂਰਾ ਪੁਰਖ ਜੈਵੀ ਹੋ ਜਾਂਦਾ ਪੂਰਾ ਪੁਰਖ ਜੈਵੀ ਹੋ ਜਾਂਦਾ ਕੋਰਨ ਪਿਆ ਭੰਜਾ ਪਾਲਪ੍ਰਮ ਚਾਹੇ ਨਾ ਵੀ ਹੋਏ ਹੋਵੇ ਦੋ ਪ੍ਰਦਾਰਥਾਂ ਨਾਲ ਵੀ ਮੁਕਤੀ ਤੱਕ ਵੀ ਹੋ ਜਾਂਦਾ ਉਹ ਗੋਗਾ ਹੀ ਹੁੰਦਾ ਬਸ ਉਹ ਦੁਹਰ ਕੁਛ ਨਹੀਂ ਕਿ ਜਿਵੇਂ ਦਿਆਣਾ ਬੋਲਦਾ ਨਾ ਤੋਤਲੀ ਆਵਾਜ਼ ਚ ਹਾਂ ਉਹ ਵੀ ਠੀਕ ਬੋਲਣ ਲੱਗ ਪਈ ਜਦੋਂ ਉਹਨੇ ਬੜਾ ਕੇ ਜੀ ਕਰਮ ਹੀ ਸਤਗੁਰ ਪਾਇਆ ਕਿਰਪਾ ਨਾਲ ਮਿਲਦਾ ਯਾਨੀ ਜਨੂ ਪਿਛਲੇ ਹਿਸਾਬ ਨਾਲ ਆਪਣਾ ਉਹ ਜੇ ਕਰਾਉਂਦਾ ਨਾ ਉਹ ਜਿਹਾ ਹਿਸਾਬ ਕਤਾ ਪਤਾ ਨਹੀਂ ਕਮਿਟਮੈਂਟ ਕਰਕੇ ਵੇਲ ਦਿੰਦਾ ਪਾਤ ਐਸਾ ਇਹ ਦੇਖੋ ਜੈਵ ਜੀ ਲੈਣੇ ਜਦੋਂ ਉਹ ਲੈ ਕੇ ਨਿਕਲਦੇ ਜੇ ਫੁਰਨਾ ਆਉਦਾ ਵੀ ਇੱਥੇ ਧੋਬੀ ਚੱਕਾਇਆ ਨਹੀਂ ਚੱਲ ਮਿਲ ਚਲੀਏ ਉਹ ਫੁਰਨਾ ਉੱਥੇ ਕਹਿੰਦੇ ਚਲੋ ਅੱਜ ਇੱਥੇ ਹੀ ਘਟ ਰਾਤ ਪੈਣੋਂ ਜਾਂਦੇ ਹੁੰਦੇ ਸੀ ਉਹ ਫੁਰਨਾ ਕਿੱਥੋਂ ਆਇਆ ਉਹ ਫੁਰਨਾ ਘਰ ਪਾਸ ਉਹ ਫੁਰਨਾ ਆ ਗਿਆ ਪਿੱਛੇ ਫੁਰਨਾ ਜਿਹੜਾ ਆਇਆ ਸਲਾਹ ਚਲੋ ਚਲੀਏ ਬਸ ਗੱਲ ਬਣ ਗਈ ਹਾਂਜੀ ਪਿੰਕੀ ਸੰਗਤ ਮਿਲ ਰਹਾ ਦਰਗਾਹ ਪਾਈ ਮਾਨ ਜੇ ਇਹੇ ਜੇ ਕੋਈ ਮਿਲ ਜਾਣ ਜਿਵੇਂ ਲੈਣੇ ਨੂੰ ਲੋੜ ਕਮ ਫਿਰ ਕਹਿੰਦਾ ਮਿਲਿਆ ਇਰਾਹ ਫਿਰ ਮੈਂ ਘਰ ਨੂੰ ਛੱਡ ਕੇ ਫਿਰ ਗਾਂ ਦੇ ਕੋ ਗਾਂਵ ਨਹੀਂ ਗਏ ਘਰ ਨੂੰ ਜੀ ਮਿਲਿਆ ਹੀ ਇਹ ਘਰ ਗਏ ਵੀ ਤਾਂ ਫਿਰ ਆ ਸੀ ਧਿਆਨ ਉਤੇ ਰਹਾ ਫ ਬੜੇ ਇਰਾਹ ਹੈ ਜੀ ਬਿਛ ਲੋ ਉਹਦੇ ਦਰکی ਸੰਧਤ ਬਿਨ ਰੋ ਸਦਾ ਹੀ ਮਿਲਿਆ ਰਹੂਗਾ ਦਰਖਾ ਜੀ ਇਮਾਨ ਵਟ ਆਪ ਜੁੜਿਆ ਜਿਹੜਾ ਉਹ ਲਾਈਟ ਪਹਿਲਾਂ ਕਰ ਦਿੰਦਾ ਜੋੜ ਵੀ ਹੁੰਦਾ ਜੋ ਕੋਈ ਜੋੜ ਸਕਦਾ ਆਪ ਜੁੜ ਜੇ ਕੋਈ ਪਹਿਲਾਂ ਹੀ ਲਉਦੀ ਹੈ ਪਾਵਰ ਹਾਊਸ ਤੋਂ ਠੀਕ ਜੇ ਤਾਰ ਆਪ ਜੁੜ ਪਾਵਰ ਹਾਊਸ ਨਾਲ ਤਾਂ ਤੁਸੀਂ ਉਹ ਤਾਰ ਨਾਲ ਟੱਚ ਕਰਕੇ ਤੁਹਾਡੇ ਜੀ ਵੀ ਉਹ ਆ ਸਾਜਦੀਏ ਕਰੰਟ ਜਿਵੇਂ ਆਪਾਂ ਇਹ ਹਾਲ ਦੇਖ ਸਕਦੇ ਆ ਸੰਸਾਰੀ ਤੌਰ ਤੇ ਜੋ ਤਾਰ ਆਬੇ ਦੀ ਜੁੜੀ ਹੋਈ ਹੈ ਆਪਾਂ ਜੋੜਦੇ ਹਾਂ ਫਰਜ਼ ਕੀਤਾ ਉਹ ਜੇ ਕਰੰਟ ਨਹੀਂ ਹੈ ਤਾਂ ਸਾਡਾ ਜੋ ਕੀ ਹੈ ਠੀਕ ਇਸ ਕਰਕੇ ਜਿਹੜਾ ਦਰਗਾ ਜਿਹੜਾ ਸ਼ਕਲ குரு ਆਪ ਜੁੜਿਆ ਹੋਇਆ ਉਸ ਦੂਏ ਨੂੰ ਵੀ ਜੋੜ ਸਕਦਾ ਪਰ ਦੂਆ ਜੇ ਚੌਗਾ ਹੋਵੇ ਜੋੜ ਦਤਾ ਦੇਖੋ ਜਿਹੜਾ ਜੋੜਨਾ ਉਹਦੇ ਉਹਦੀ ਇੱਛਾ ਤੇ ਧਿੰਦ ਕਰਦਾ ਉਹ ਤਾਂ ਜੋੜ ਸਕਦਾ ਜੇ ਜੋੜਨਾ ਕੋਈ ਚਾਹੁੰਦਾ ਹੋਵੇ ਤਾਂ। ਤੌਂਦੇ ਵਾਹ ਵਾਹ ਉਚਰੈ ਉਠਦੇ ਵੀ ਵਾਹ ਕਰੈ। ਹੁਣ ਸੋਦੇ ਵੀ ਆ ਵਾਹ ਵਾਹ ਨੂੰ ਸੁਪਨਾ ਹੁੰਦਾ ਨਾ। ਸੁਪਨਾ ਹੁੰਦਾ ਆਪਾਂ ਨੂੰ ਸੁੱਤੇ ਹੁੰਦੇ ਆ ਨਾ ਜਾਗਦੇ ਰਹਦੇ। ਜਾਗਣ ਤੇ ਸੁਪਨਾ ਜਿਹੜਾ ਜਾਗਣ ਤੇ ਸੁਪਨਾ ਪਾ ਕੇ ਹਨ ਆ ਹੋ ਜਾਗਣ ਤੇ। ਅਜੋ ਕੰਨੇ ਜੁੜਿਆ ਤਾਂ ਚਾਹੇ ਹੋਇਆ ਨਹੀਂ ਹੈਗਾ ਪਰਮਿਸ਼ਨ ਨਾਲ। ਹਰੇ ਬੇਹੋਸ਼ ਮਰੇ ਤਾਂ ਸ਼ਬਦ ਵਿਚਾਰ ਚੱਲਦਾ ਹੀ ਰਹਿੰਦਾ ਉਹਦੇ ਅੰਦਰ ਆਹ ਹੋਂ ਸੁੱਤਾ ਪਿਆ ਲੋਕਾਂ ਕਰਕੇ ਉਹ ਉਸ ਅਵਸਥਾ ਦੀ ਜਿਹੜੀ ਰਿਸਟ ਹੈ ਸੌਣ ਬਰਾਬਰੇ ਚਲੀ ਜਾਂਦੀ ਹੈ ਉਹ ਤੇ ਅਣੀ ਅਵਸਥਾ ਹੁੰਦੀ ਹੈ ਡਾਕਟਰ ਦੀ ਮਦਦ ਨਾਲ ਆਪਾਂ ਵੀ ਬੰਦਰਾ ਦੋ ਸੁਗਰਾਉਂਦਾ ਹੋਵੇ ਬੇਚੈਤੀ ਰਹਿੰਦੀ ਹੈ ਕਿਉਂਕਿ ਸਾਡੇ ਸੁਪਨੇ ਦਾ ਦਿਮਾਗ ਨਾਲ ਸੰਬੰਧ ਹੈ ਉਹ ਸੁਪਨੇ ਦਾ ਬੁੱਧੀ ਹਰ ਦਿਲ ਨਾਲ ਸੰਬੰਧ ਹੈ ਤੇਰ ਜਿਹੜੀ ਹੈਗੀ ਤੇਰ ਛੱਡੀ ਹੁੰਦੀ ਹੈ ਬਿਲਕੁਲ ਹੀ ਛੱਡੇ ਤੇ ਉਹ ਅਸਾ ਪਤਾ ਲੱਗਦਾ ਉਹ ਤੋਂ ਪਹਿਲਾਂ ਨਹੀਂ ਪਤਾ ਲੱਗਦਾ ਪ੍ਰੋਬਲਮ ਨਾਨਕ ਤੇ ਮੁਹਜਲੇ ਜੇ ਨਿਤ ਉੱਠ ਸਮਾਲੇ ਦੇ ਨੇ ਨੇ ਮਦਦ ਪਹੁੰਚਦੀ ਹੋ ਜੋ ਨਿਤ ਉੱਠ ਦੇਖੋ ਉਹ ਸੁਪਨੇ ਚ ਉੱਠ ਵੀ ਚੋਦੇ ਪਰ ਉਹਦਾ ਸੌਣਾ ਬਰਾਬਰ ਹੈ ਜੁੜੇ ਹੋਏ ਉਦੋਂ ਵੀ ਇਹ ਜੁੜੇ ਹੋਏ ਜਦ ਉੱਠਦੇ ਨੇ ਉਦੋਂ ਬੋਲ ਸਕਦੇ ਨੇ ਸੰਸਾਰੀ ਗੱਲ ਵੀ ਕਰ ਸਕਦੇ ਪਰ ਉਸ ਵੇਲੇ ਕੱਲੇ ਆਪ ਜੁੜੇ ਹੋਏ ਨੇ ਜੁੜੇ ਹੋਏ ਪਰ ਸੰਸਾਰ ਦੇ ਵੀ ਕਰ ਸਕਦੇ ਉਦੋਂ ਕਿਸੇ ਨਾਲ ਆਪ ਅੰਦਰ ਜੁੜੇ ਹੋਏ ਹੋ ਗੱਲ ਕਹਿ ਦੇਣੀ ਦਾ ਸਕਾਲੀ ਹੈ ਉਹ ਸੁਖ ਜਨ ਵਾਲੇ ਵਾਸਤੇ ਬੜੀ ਪ੍ਰੋਬਲਮ ਇਸ ਗੱਲ ਸਤਿਗੁਰ ਸੇਵੀ ਆਪਣਾ ਪਾਈਏ ਨਾਮ ਆਧਾਰ ਜਿਹੜਾ ਨੇ ਆਪਣਾ ਸਤਿਗੁਰ ਦੀ ਸੇਵਾ ਕੀਤੀ ਆਪਣਾ ਦੇਖੋ ਲੱਭ ਲੱਗਿਆ ਸਤਿਗੁਰ ਦੇ ਨਾਲ ਹਾਂਜੀ ਉਹ ਜਿਹੜਾ ਸਾਜਾ ਸਤਗੁਰ ਹੁੰਦਾ ਜੇ ਕੋਈ ਰੋਜ਼ ਨੂੰ ਸਤਗੁਰ ਆਪਾ ਕਹਦੇ ਗੁਰੂ ਨਹੀਂ ਲੱਭ ਲੱਗਿਆ ਸਤਗੁਰ ਦੇ ਸਕਦਾ ਸਤਗੁਰ ਸੱਤਪੁਰਖ ਜਿਹੜਾ ਜਾਣਿਆ ਸਤਗੁਰ ਤੇ ਸਕਲੂ ਹਾਂ ਹਾਂ ਉਹ ਸਾਨੇ ਹੁੰਦਾ ਜੇ ਸੰਬੰਧ ਵਿੱਚ ਬੈਠੇ ਨੇ ਉਹ ਸੰਗਤ ਸਾਧੀ ਦਾ ਸਤਿਗੁਰ ਹੋ ਸਕਦਾ ਪਰ ਜਿਹੜਾ ਸਾਡਾ ਅੰਤਰ ਆਤਮਾ ਉਹ ਸਾਡਾ ਹੀ ਸਤਿਗੁਰ ਹੈ ਆਪਣਾ ਤੇ ਸਪੈਸ਼ਲੀ ਲਫ਼ਜ਼ ਆਇਆ ਹੋਇਆ ਹੈ ਆਪਣਾ ਜਿਹੜਾ ਲਫ਼ਜ਼ ਹੈ ਆਪਣਾ ਵੀ ਤਾਂ ਲਫ਼ਜ਼ ਹੈ ਸਪੈਸ਼ਲ ਅਲੱਗ ਕਰ ਦਿੰਦਾ ਸਤਿਗੁਰ ਹੋਰ ਹੈ ਹਾਂ ਆਪਣੇ ਵਾਸਤੇ ਜਿਹੜਾ ਹੈ ਨਾ ਉਹ ਆਪਣੇ ਜਦ ਬਾਹਰੋਂ ਗੱਲ ਕਰਦਾ ਮੂਠ ਬੋਲ ਕੇ ਕਰਦਾ ਫਿਰ ਆ ਜਾਂਦੀ ਹੈ ਨਾ ਬਹੁਤ ਹੀ ਹਵਾ ਚ ਆ ਜਾਂਦੀ ਹੈ ਜਦੋਂ ਸ਼ਬਦ ਵਿਚਾਰ ਕਰਦੇ ਲੋ ਮਾਇਦੀ ਬੰਦੀ ਉਹ ਵਿਚਾਰ ਵਾਲੀ ਗੱਲ ਨੂੰ ਅਸੀਂ ਬਾਹਰ ਬੋਲ ਕੇ ਪ੍ਰਗਟ ਕਰਦੇ ਬੋਲ ਕੇ ਪ੍ਰਗਟ ਕਰਦੇ ਆ ਦੁੱਧ ਬਣ ਜਾਂਦਾ ਫਿਰ ਇਹ ਅੰਦਰ ਜਿਹੜਾ ਲੜਕਦੇ ਵਿਚਾਰ ਕਰਦੇ ਆ ਮੱਖਣ ਹੁੰਦਾ ਜਦ ਆਪਾਂ ਪਾਣੀ ਵਿਚਾਰਦੇ ਮੱਖਣ ਹੁੰਦਾ ਉਹਦੇ ਮੱਖਣ ਦੀ ਪ੍ਰਕਿਰਤੀ ਹੁੰਦੀ ਹੈ ਜਦ ਉਹ ਅਸੀਂ ਦੱਸ ਦੇਣ ਬੋਲ ਕੇ ਉਹਨੂੰ ਫਿਰ ਮੱਖਣ ਉਹ ਦਿੱਤਾ ਨਹੀਂ ਜਾ ਸਕਦਾ ਮੱਖਣ ਬਾਹਰ ਤਾਂ ਗੁਰਬਾਣੀ ਕਬੀਰ ਕਹਿੰਦੇ ਜਿੰਨ ਬੁਲਾਇਆ ਤਨ ਖਾਇਆ ਵਖਰੇ ਹੋਊ ਜਿਹੜਾ ਆਪਣੇ ਅੰਦਰ ਲੜਕੂ ਆ ਹਾਂ ਵਖਰੇ ਤੁਸੀਂ ਆਪਣੇ ਵਿਚਾਰ ਤੋਂ ਖਾ ਸਕਦੇ ਹੋ ਦੂਆ ਤੁਹਾਨੂੰ ਦੁੱਧ ਦੇ ਸਕਦਾ ਬਖੜਦੇ ਸਕਦਾ ਕੋਈ ਕਿਸ ਨੂੰ ਨਾਮ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ ਨਾਮ ਦੱਸਿਆ ਜਾ ਸਕਦਾ ਜਿਹੜਾ ਨਾਮ ਦੱਸੈ ਜੀ ਸਤ ਸੇਵੀ ਸੁਪਣਾ ਪਾਈਏ ਨਾਮ ਆਧਾਰ ਨਾਮ ਦਾ ਦਾ ਦਰਬ ਦਾ ਦਾ ਅਰਜ ਦਾ ਦਰਬ ਦਾ ਆਪਣੇ ਆਪਣੇ ਅੰਦਰੋਂ ਬਾਹਰੋਂ ਵੀ ਉੱਗਣ ਉੱਤਰੋਂ ਉਹ ਸ਼ਬਦ ਅੰਦਰ ਹਿਲਦੇ ਜੇ ਪੈਦਾ ਹੋਣਾ ਤੁਸੀਂ ਉਹ ਜੁੜਨਗਾ ਉਹਦੇ ਨਾਲ ਦੂਰਾਂ ਨਹੀਂ ਜੁੜ ਸਕਦਾ ਉਹ ਜਿਹੜਾ ਤੁਹਾਡੇ ਅੰਦਰ ਸ਼ਬਦ ਪੈਦਾ ਹੋਣਾ ਤੁਸੀਂ ਉਹ ਜੁੜ ਸਕਦੇ ਹੋ ਤੁਹਾਡੀ ਉਸਰ ਤੇ ਜੁੜ ਸਕਦੇ ਦੂਏ ਦੇ ਨਹੀਂ ਜੁੜ ਸਕਦੇ ਦੂਏ ਨੂੰ ਤੁਸੀਂ ਦੱਸ ਸਕਦਾ ਕਿ ਭਾਈ ਇਹ ਕਿੱਥੋਂ ਪ੍ਰਗਟ ਹੋ ਜੁੜ ਆਇਆ ਜਾ ਹੋ ਲੁੱਛੜ ਸਕਦੇ ਹੋ ਬਸ ਇਹ ਬਾਤ ਪਾਈ ਦੀ ਬੁੱਝਣਾ ਬਾਈ ਤੂੰ ਬੁਝਾਰਤਾ ਹੈ ਬਾਪ ਬੁੱਝਣ ਤੂੰ ਬੁਝੇ ਡੋਰਾ ਇਹ ਬੁੱਝਣ ਵਾਲੀ ਗੱਲ ਰਹਿ ਜਾਂਦੀ ਹੈ ਜੇ ਆ ਦੱਸ ਦੇਣ ਸੀ ਇੱਥੇ ਪਰ ਆ ਵਿੱਚ ਹੈ ਨਾ ਪਬਲਿਕ ਇਸ ਟੂ ਵਾਲੀ ਹੈ ਠੀਕ ਹੈ ਜੀ ਹਾਂ ਜੀ ਕੱਢ ਲਏ ਹਰ ਦਾਤ ਕਰੇ ਦਾਤਾਰ ਪੌਜਲ ਡੁੱਬ ਕੱਢ ਲਏ ਉਹ ਜਿਹੜਾ ਅੰਦਰੋਂ ਪੌਜਲ ਡੁੱਬ ਜਾ ਤਾਂ ਕੱਢਦਾ ਅਸਲ ਸ਼ੇ ਉਹ ਉਸੇ ਨੂੰ ਕੱਢੂ ਆਪਣੇ ਹੀ ਕੱਢਦਾ ਹੈ ਆਪਣਾ ਕੱਢੂ ਫੌਜਲ ਡੁੱਪਦੇ ਨੂੰ ਕਿ ਦੁਆ ਕਰਦਾ ਆਪੇ ਪਤਾ ਸਾਡੇ ਸੰਸਾਰ ਨੂੰ ਕੱਢੇ ਉਹ ਲਫਜ਼ ਵਰਤ ਕੇ ਬਹੁਤ ਹੀ ਸਪੈਸ਼ਲ ਗੱਲ ਹੋ ਗਈ ਫੌਜਲ ਚੋਂ ਕੱਢਣਾ ਅੰਦਰ ਵਾਲੇ ਦੇ ਉਹ ਤਰ੍ਹਾਂ ਦੇ ਕਰਦਾ ਦੁਆ ਦੇ ਨੂੰ ਕੱਢ ਸਕਦਾ ਜਿਹੜੇ ਕਹਿੰਦੇ ਨੇ ਸਾਦਾ ਤਾਂ ਸਤਗੁਰ ਆ ਜੀ ਬਾਹਰ ਫੜ ਕੇ ਲੈ ਜੂਗਾ ਉਹ ਵੀ ਸੀ ਯੂਜ਼ ਕਰ ਦੇਵੇ ਇਹ ਪੰਤੀ ਦਾ ਹਾਂ ਦੂਰ ਦੇ ਕੋਈ ਕਿ ਸਾਨੂੰ ਨਹੀਂ ਕਰ ਸਕਦਾ ਆਪਣੇ ਆਂ ਹਰ ਦਾਤ ਕਰੇ ਦਾਤਾਰ ਦਾ ਕੀ ਭਾਵ ਹੈ ਜੀ ਉਹ ਲੋਕਾਂ ਨੂੰ ਦਾਤ ਦਾ ਅਸਰ ਮੈਂ ਦੇ ਸਕਦਾ ਹੈ ਫਿਰ ਸਕਦਾ ਹੈ ਕਹਿੰਦੇ ਸਕਦਾ ਦੂਜਿਆਂ ਨੂੰ ਸੰਸਾਰੀ ਨੂੰ ਠੀਕ ਵੱਦਤ ਵੱਦਤ ਇਹ ਕਰ ਸਕਦਾ ਦੱਸ ਸਕਦਾ ਤੂੰ ਕੋਈ ਨਿੱਤ ਹਾਂ ਹਾਂ ਉਹਦੇ ਵਿੱਚ ਕਰ ਸਕਦਾ ਮੈਂ ਕੱਢ ਨਹੀਂ ਸਕਦਾ ਹੋਰ ਨਾ ਆਪਣਾ ਦੋਨੋਂ ਬਾਹਰ ਕੱਢ ਲੂਗਾ ਆਪਣਾ ਹਾਂ ਹਾਂ ਸਹੀ ਤਨ ਨਾਮ ਕਰੇ ਵਾਪਾਰ ਆ ਦੇਖੋ ਬਪਾ ਨੇ ਜਿਹੜਾ ਕਰਦਾ ਜਾਬ ਜਾ ਉਹ ਧੋਗ ਦਾ ਵਪਾਰ ਕਰਨਾ ਦੂਏ ਨੂੰ ਦੱਸਣਾ ਵਿਚਾਰ ਕਰੀ ਵਿਚਾਰ ਚੋਂ ਦੋਹਾਂ ਨੂੰ ਗੱਲ ਜਾਂਦਾ ਵਿਚਾਰ ਚ ਨਾਲ ਦਾ ਵਪਾਰ ਕਰਦੇ ਨੂੰ ਗੁਰਬਖਾਉ ਵਿੱਚ ਹੀ ਜਦ ਬੈਠ ਕੇ ਗੁਰਬਾਣੀ ਦਾ ਵਿਚਾਰ ਕਰਦੇ ਤੇ ਉਹਨਾਂ ਦਾ ਵਪਾਰ ਹੈ ਛੇ ਚਲੋ ਦੋਹੇ ਉਹਦੀ ਕੋਈ ਵੀ ਕਿਸੇ ਨੂੰ ਦੱਸਦਾ ਹੈ ਉਹ ਖੁਦ ਅੰਦਰੋਂ ਇੱਕ ਗਿਆਨ ਹੋਰ ਵਧੀ ਜਾਂਦਾ ਹੈ ਤੇ ਸਾਰੇ ਗਿਆਨਾਂ ਦੇ ਵਿੱਚ ਇਹੋ ਜਿਹੀ ਹਾਲਤ ਹੈ ਜਿਵੇਂ ਤਜਰਬਾ ਪੜਾਉਣ ਵਾਲੇ ਨੂੰ ਖੁਦ ਤਜਰਬਾ ਵਧੀ ਜਾਂਦਾ ਹਰ ਪੇਸ਼ੇ ਦੇ ਵਿੱਚ ਹਰ ਉਹਦੇ ਵਿੱਚ ਵਧੀ ਜਾਂਦਾ ਇਹ ਵੀ ਆਤਮਿਕ ਗੱਲ ਹੈ ਗਾਣੇ ਦਾ ਕੁਝ ਆਈ ਜਾਂਦਾ ਉੱਚੇ ਤੋਂ ਉੱਚਾ ਭਗਵਾਨ ਹੈ ਵਸਤਾ ਉੱਚੀ ਉੱਚੀ ਹੋ ਜਾਂਦੀ ਹੈ ਠੀਕ ਇਸ ਕਰਕੇ ਉਹ ਨੂੰ ਦੱਸ ਪਾਰਤਾ ਮਿਲਦਾ ਜੇ ਬਰਬਰ ਦਾ ਨਾਮ ਹੋਵੇ ਉਹ ਥਨੇ ਦੇ ਰਿਹਾ ਜੇ ਲੋਕਾਂ ਨੂੰ ਦੇ ਰਿਹਾ ਦੱਸ ਰਿਹਾ ਸਮਝਾ ਰਿਹਾ ਹੈ ਨਾ ਤੇਰਾ ਸਵਾਲ ਆ ਜਾਣਾ ਦੁਬੇ ਤੇਰਾ ਆਪਰ ਪੁੱਛਣਾ ਹੈ ਸ਼ਬਦ ਆ ਜਾਨੀ ਗੀ ਉਹ ਕਿੱਥੋਂ ਲੈ ਕੇ ਆਊਗਾ ਉਹ ਜਵਾਬ ਉਹ ਫੇਰ ਲੈ ਕੇ ਆਉ ਜੋ ਬੈਠਾ ਕੋੜਾ ਆਪਣੇ ਤੇ ਸੋਈ ਸੋਈ ਦੇਵੇ ਉਹਦਾ ਦੇ ਹੈ ਕਬੀਰ ਕਹਿੰਦਾ ਕੋਈ ਲੜਕਾ ਵਿੱਚ ਲੜਕੀ ਵਿੱਚ ਕੋਏ ਸਾਜਾ ਕਰੇ ਕਰੇ ਕਿੱਥੇ ਆ ਕੇ ਪਹੁੰਚੀ ਹੋਣੀ ਹੈ ਉਹ ਸ਼ਲੋਕ ਜਿਹੜਾ ਕਬੀਰ ਸਤਗੁਰ ਦਾ ਨਾਮ ਹੈ। ਹਾਂਜੀ। ਸਤਗੁਰ ਬੜਾ ਹੈ ਨਾ ਕਬੀਰ। ਹਾਂਜੀ। ਬਣ ਸਿੱਖ ਆਨਦੇ ਸਿੱਖ। ਨੇ ਉਹ ਬਣ ਜਾ ਰਹੇ ਨੇ। ਹਾਂਜੀ। ਸਤਗੁਰ ਕਰਦਾ ਹੈ। ਉਹ ਲੈਂਦੇ ਨੇ। ਲੈਣ ਵਾਲੇ ਬਣ ਜਾ ਰਹੇ ਨੇ ਜੇ ਪ੍ਰਾਪਤ ਕਰਦੇ ਨੇ। ਕਰਨ ਦਾ ਭਾਵੇਂ ਮੰਨਣ ਵਾਲੇ ਬਣ ਜਾ ਰਹੇ ਨੇ। ਗੁਰਸਿੱਖ ਜਿਹੜੇ ਬੰਦ ਨੇ ਸੁਣ ਕੇ ਉਹ ਵਰਤ ਕਰਦੇ ਵਰਤ ਜਾਦੇ ਬੜਾ ਜਿਆਦਾ ਵਰਤ ਜੇ ਆਪ ਵਰਤਦੇ ਨੇ ਤਾਂ ਨੇ ਉਹ ਵੀ ਦੱਸਦੇ ਨੇ ਜੇ ਕੋਈ ਮਿਲਦਾ ਹੈ ਗੱਲ ਹੋਈ ਆਇਆ ਕਹੀਂ ਆਪਣੇ ਵੀ ਕਰਦੇ ਆਪਸ ਵਿੱਚ ਉਸ ਦੇ ਵਿੱਚ ਉਹ ਗੁਰਸਿੱਖ ਉੱਡ ਹੋ ਜਾਂਦੇ ਨੇ ਵਰਤ ਕਰੇ ਉਹਦੇ ਜੋ ਨਾਨਕ ਜਿਨ ਕਉ ਕਿਰਪਾ ਤਿੰਨ ਸੇਵਿਆ ਸਿਰਜਣਹਾਰ ਨਾਲ ਕਾਹ ਜਨਾ ਤੇ ਕਿਰਪਾ ਹੁੰਦੀ ਹੈ ਨਾ ਹਾਂਜੀ ਉਹ ਹੀ ਇਸ ਲਈ ਦਿਲ ਚ ਲੱਗਦਾ ਹੈ ਸੇਵਿਆ ਸਿਰਜਣਹਾਰ ਸੇਵਿਆ ਸਿਰਜਣਹਾਰ ਦਾ ਮਤਲਬ ਇਹ ਹੈ ਸੁਣ ਕੇ ਗਾਉਂ ਦੱਸਣ ਜਿਵੇਂ ਖੇਤੀ ਕਰਦੇ ਖੇਤੀ ਹੋ ਜਾਂਦੀ ਹੈ ਸੁਣ ਲਿਆ ਉਹਦੇ ਤਹਾਂ ਜਾ ਕੇ 5 10 ਕੁ ਦੱਸ ਦਿੱਤਾ ਉਹਨਾਂ ਚੋਂ ਇਕੱਲੇ ਇਕੱਲੇ ਦੀ 10 10 ਨੂੰ ਦੱਸ ਦਿੰਦਾ। ਉਹਨਾਂ ਚੋਂ ਗਾਂ ਪੁਜ ਪੰਚਾਇਤ ਤੱਕ ਨੂੰ ਦੱਸ ਦਿੰਦਾ। ਐ ਫੈਲ ਜਾਂਦੀ ਹੈ ਗੱਲ ਇਹ। ਜਿਹਨੂੰ ਖੇਤੀ ਕਹਿੰਦੇ ਖੇਤੀ। ਹਾਂਜੀ। ਠੀਕ ਹੈ। ਕੇ ਜਨ ਭਗਤ ਹੈ। ਸੱਚ ਸੱਚਾ ਜਿਨੀ ਅਰਾਧਿਆ। ਹੁਣ ਸੱਚ ਦੀ ਗੱਲ ਆਈ ਜਾਂਦੀ ਹੈ। ਸੱਚ ਇੱਕ ਵਚਨ ਹੋਊਗਾ, ਹੁਕਮ ਹੋਊਗਾ। ਜਿਹੜਾ ਸੱਚੇ ਜਲਦੇ ਉਹ ਸੱਚ ਦੇ ਭਗਤ ਨੇ ਸੱਚੇ ਨਾਲ ਸੱਚਿਆਰੇ ਬਰਕਰਕੇ ਸੱਚਿਆਰੇ ਨੇ ਉਹਦਾ ਅੱਲਾ ਤਾਂ ਪਹਿਲਾਂ ਹੀ ਸੱਚ ਸੀ ਸਤ ਸਰੂਪ ਸੀ ਉਹ ਸੱਚੇ ਨੇ ਉਹ ਸੱਚੇ ਦੇ ਭਗਤ ਨੇ ਸੱਚ ਕਿਤੇ ਸੱਚ ਸੋਨਾ ਖਾਸਮ ਸੱਚ ਸ਼ਬਦ ਉਹ ਜਿਹੜਾ ਸ਼ਬਦ ਗੁਰੂ ਆ ਉਹ ਸੱਚ ਉਹਦੇ ਭਗਤ ਨੇ ਉਹਦੇ ਨਾਲ ਜੁੜੇ ਹੋਏ ਨੇ ਉੱਥੋਂ ਬਿਲਦਾ ਸਭ ਕੁਝ ਉਹਦੀ ਅਰਾਧਨਾ ਕਰਦੇ ਨੇ ਉਹਦੀ ਕੁਰਤੀ ਕਰਦੇ ਨੇ ਯਾਨੀ ਸੱਚ ਦੀ ਬਰਾਬਰੀ ਨਹੀਂ ਕਰਦੇ ਸੱਚੇ। ਕਰਿਆ ਵੀ ਹੈ ਜੇ ਗੁਰ ਤਸਉਦਿਲ ਦੀ ਬਰਾਬਰੀ ਨਹੀਂ ਕਰ ਕੋ। ਮੈਡੀਕਲ ਨਾ ਮਸੂਦਰ। ਹਾਂ। ਕੋਈ ਸਬੂਦਰ ਵੱਲ ਨੂੰ ਜਾ ਰਿਹਾ ਨਾ। ਉਹ ਸੋਗਰ ਵਿੱਚ ਜਾ ਕੇ ਸਬੂਲ। ਤਸਉਦਿਲ ਦੀ ਗੱਲ ਨਾ ਆਪਣੇ ਆਪ ਨੂੰ ਕਦੇ ਵੀ। ਜਿਹੜੇ ਹਰ ਕੇ ਸੰਤੂ ਨੇ, ਹਰ ਕੇ ਜਾਨੂ ਨੇ। ਸਾੱਚੇ ਦੇ ਭਗਤ ਨੇ। ਸੱਚੇ ਦੇ ਵੀ ਭਗਤ ਨੇ ਜਿਹੜਾ ਅੰਦਰ ਉਤਰਾਤਮਾ ਦੀ ਸੱਤਾ ਸੀ ਉਹ। ਇਹ ਮੰਨ ਕਰਕੇ ਸਚਿਆਰਾ ਹੋਇਆ ਅੰਤਲੇ ਦੇ ਭਗਤ ਤੇ ਜਾਂ ਫਿਰ ਉਹਦੇ ਭਗਤ ਤੇ ਇਹ ਕਿਨਾਰੇ ਨਾਲ ਜੁੜੀ ਆ ਜਾ ਕੇ ਸਾਰਾ ਸਬੂਤਰ ਵਿੱਚ ਆ ਗਿਆ ਕਿਨਾਰਾ ਉਹ ਕਿਨਾਰਾ ਜਿਹੜਾ ਹੈਗਾ ਆਪਣਾ ਆਪਾਂ ਜਿਹੜਾ ਸਬੂਤਰ ਦਾ ਉਹ ਸਬੂਤਰ ਕਿਨਾਰਾ ਹੈ ਤਾਂ ਹੀ ਦਰਗਾਹ ਹੈ ਉਹ ਦਵਾਰ ਹੈ ਮੁਕਤ ਦਵਾਰਾ ਹੈ ਉਹ ਕਿਨਾਰੇ ਤੇ ਆ ਕੇ ਮਿਲ ਕੇ ਸਬੂਤਰ ਨਾਲ ਮਿਲ ਕੇ ਜੀ ਗੁਰੂ ਮੁਖ ਖੋਜ ਢੰਡੋਲੇ ਆ ਤਿੰਨ ਅੰਦਰੋਂ ਹੀ ਸੱਚ ਲੱਭਿਆ ਆ ਦੇਖੋ ਜਿਹਨੇ ਆਪਣਾ ਅੰਦਰ ਖੋਜਿਆ ਉਸ ਸੱਚ ਲੱਭ ਜਾਂਦਾ ਉਹ ਕੌਣ ਸੀ ਕਿ ਕਬੀਰ ਦੀ ਗੱਲ ਆ ਜੂਗੀ ਗਲਤ ਨੇ ਅੰਦਰ ਖੋਜਿਆ ਸੱਚ ਲੱਭ ਗਿਆ ਗੁਰੂਨ ਦੀ ਗੱਲ ਆ ਜੂਗੀ ਕਿਉਂ ਗੁਰਨਾਥ ਨੂੰ ਕਿਸੇ ਨੇ ਆਦਿਲੀ ਹੋ ਮਿਲਿਆ ਪੜਾਉਣ ਵਾਲਾ ਹਾਂ ਗੁਰਬਾਣੀ ਜਪਤ ਬੜੀ ਰੂਹਵਲੀ ਆ ਦਿਵਿਨ ਕੋ ਬਿੜਿਆ ਉਹਦੋ ਟੋੜਦੇ ਸੀ ਕੈਨੇ ਦੇ ਸਿੱਧਾਂ ਨੂੰ ਕਿ ਅਸੀਂ ਕੋਈ ਗੁਰਬਾਣੀ ਟੋੜਦੇ ਜੀ ਪੀਵਿਆ ਨੇ ਬੜਾ ਕਰਕੇ ਸਾਹਿਬ ਕਰਕੇ ਸੇਵੇ ਸੱਚੇ ਤੋਂ ਆਪ ਨਹੀਂ ਰਹੇ ਨੇ ਸੱਚ ਦੀ ਬਰਾਬਰੀ ਨਹੀਂ ਕੀਤੀ ਖਸਨ ਕਰੇ ਬਰਾਬਰੀ ਫੋਪੋ ਦੀ ਬਰਾਬਰੀ ਨਹੀਂ ਕੀਤੀ ਹਕੂਮਤ ਇਹ ਅਧਿਧ ਚੱਲੇ ਨੇ ਤਾਂ ਜਿਹੜਾ ਸੇਵਾ ਹੈ ਸਿਰ ਹੈ ਜਿੱਦੇ ਹੁਕੂਮਤ ਉਹ ਹੁਕੂਮਤ ਅਨੁਸਾਰ ਚੱਲਣਾ ਸੇਵਾ ਹੁੰਦੀ ਹੈ ਇਹ ਸੇਵਾ ਕਰਨ ਕਿਉਂਕਿ ਜਿਹੜਾ ਚਾਕਰ ਹੋ ਕਹੋ ਸੇਵਕ ਹੁੰਦਾ ਉਹ ਚਾਕਰ ਲੱਗੇ ਚੱਕ ਜੇ ਚੱਲੇ ਖਸਮੇ ਪਾਏ ਖਸਮ ਖਸਮ ਦੀ 4-5 ਚੱਲੇ ਉਹ ਚਾਕਰ ਆਪਣੇ ਛਾਵਾਂ ਹਾਲ ਚੱਲੇ ਜਾਂ ਕਲੀਦ ਹਾਂ ਹਾਂ ਹਾਂ ਠੀਕ ਹੈ ਜੀ ਤਾਂ ਹੀ ਸੱਚ ਨੂੰ ਸਾਹਿਬ ਕਹਿੰਦਾ ਹਾਂ ਜੀ ਸਤਿ ਸਾਹਿਬ ਸੱਚ ਜਿਹੜੀ ਹਾਂ ਹਾਂ ਹਾਂ ਹਾਂਜੀ ਗਾਲ ਕੱਢ ਕੇ ਮਾਰਤੇ ਨੇ ਸਾਡੇ ਕੋਈ ਐ ਵੀ ਮਾਰ ਦਤਾ ਹੋ ਜਿਵੇਂ ਕਦੇ ਝੋਟੇ ਦੇ ਬੈਠਾ ਦਿਖਾਉਂਦੇ ਨੇ ਕਦੇ ਜੰਮ ਉਹ ਖਾਣਦੇ ਨੇ ਨਾ ਛੋਟਾ ਬਣਾ ਕੇ ਉਦੋਂ ਪਰਮ ਪੈ ਜਾਊਗਾ ਸਾਡੇ ਹੀ ਹੈ ਸਾਡੇ ਆ ਸਮਝ ਆਈ ਹੈ ਵੀ ਕਾਲ ਜਿਹੜਾ ਹੁੰਦਾ ਨਾ ਸਮਾਂ ਹੁੰਦਾ ਹੈ ਆਤਮਾ ਤੇ ਕਾਲ ਸਮਾਂ ਹੁੰਦਾ ਅਸਲ ਦੇ ਵਿੱਚ ਠੀਕ ਹੈ ਸਮੇ ਦਾ ਸਰੀਰ ਬਾਹਰ ਤੇ ਅਸਰ ਤੇ ਅਸਰ ਇਹ ਨਹੀਂ ਹੁੰਦਾ ਆਤਮਾ ਤੇ ਅਸਰ ਨਹੀਂ ਹੁੰਦਾ ਸਮੇ ਦਾ ਆਤਮਾ ਕਾਲ ਤੋਂ ਪਰੇ ਇਸ ਕਰਕੇ ਆਤਮਾ ਨੂੰ ਪਹਿਲਾਂ ਹੀ ਕਹਿਤਾ ਚਾਹੇ ਜਬਰਨ ਵਾਂਗ ਜਿਵੇਂ ਮਰ ਬਰਦੀ ਆਦਮ ਨੂੰ ਬਰੇ ਹੁੰਦੀ ਹੈ। ਵਰਦੀ ਨਹੀਂ। ਕਬੀਰ ਕਹਿੰਦਾ ਇਹ ਜਿਹੜਾ ਮਰਦਾ ਨਹੀਂ ਤੋਂ ਇਹਨਾਂ ਨਾ ਬਾੜਨ ਜੋ ਨਾ ਬਾੜਨ ਦੀ ਚੀਜ਼ ਹੈ। ਮਨ ਨੂੰ ਬਾੜਨ ਬਾੜਨਾ ਕਹਿ ਵੀ ਦਿੱਤਾ ਇਹ ਕਹਿੰਦਾ ਵੀ ਮਰਨ ਦੀ ਚੀਜ਼ ਉਹਦੀ। ਹੁਣ ਹੈ ਵੀ ਨਹੀਂ ਵਰਦਾ ਮਰਦਾ ਵੀ ਹੈ। ਠੀਕ ਹੈ। ਹੁਣ ਆ ਵਿਦਵਾਨ ਕਰਨ ਨੇ ਇਹ ਤਾਂ ਆਪਾਂ ਵਿਰੋਧੀ ਗੱਲ ਠੀਕ ਹੈ। ਆਪਾਂ ਵਿਰੋਧੀ ਲੱਗਦੀ ਹੈ ਪਰ ਹੈ ਜੀ। ਕਿਉਂਕਿ ਗੱਲ ਗੁੱਝਣ ਵਾਲੀ ਹੈ। ਕੁਝਾਦਣਾ ਜਿਹੜਾ ਇਹ ਹੀ ਬਲ ਹੁਣ ਆਊਗਾ ਕਿ ਫੇਰ ਹੋਇਆ ਸਾਧਿਆ ਮਨ ਲੈਣਾ ਆਪਣੇ ਨੂੰ ਇਹ ਹੀ ਸਾਧ ਸੱਚ ਸੱਚਾ ਸਬਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਧਿਆ ਦੇਖੋ ਇੱਕ ਸੱਚ ਵੱਡਾ ਹੈ ਇੱਕ ਸੱਚਾ ਵੀ ਵੱਡਾ ਹੈ ਸੰਸਾਰ ਵਿੱਚ ਸੱਚਾ ਵੱਡਾ ਵੈਸੇ ਸੱਚ ਵੱਡਾ ਸੱਚਾ ਕਹਿੰਦਾ ਸੱਚ ਵੱਡਾ ਮੇਰੇ ਰੂਹੀ ਦਰਿਆ ਕਹਿੰਦੇ ਸਮੁੰਦਰ ਮੈਂ ਚੱਲਿਆ ਆਜੋ ਬਲੇ ਨਾਲ ਰਲਜੋ ਵੱਡਾ ਸਮੁੰਦਰ ਦੇ ਵਿੱਚ ਸੱਚਾ ਵੱਡਾ ਹੈ ਸੱਚਾ ਵੱਡਾ ਹੈ ਸੱਚਾ ਕੌਣ ਭਗਤ ਭਗਤ ਬਰਾਬਰ ਹੋਰ ਨੂੰ ਕੋਈ ਬੱਟਕ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਹੋਰ ਨੂੰ ਕੋਈ ਸੰਸਾਰ ਦੇ ਵਿੱਚ ਤਾਂ ਸੱਚਾ ਹੀ ਵੱਡਾ ਹੈ ਆਪਸਾ ਅਡਰ ਦੇ ਵਿੱਚ ਤਾਂ ਸੱਚਾਈ ਵੱਡਾ। ਕੋ ਸੱਚ ਪਰੇ ਆਪਸਾ ਅਡਰ ਤੋਂ। ਹਾਂਜੀ। ਬਸ ਇਹ ਕਰਕੇ ਸੱਚ ਹੀ ਵੱਡਾ ਸੱਚਾ ਵੀ ਵੱਡਾ। ਸੱਚ ਸੇਵਨ ਸਥੇ ਇਹ ਆ। ਸੱਚ ਉਹ ਸੇਵਦੇ ਨੇ ਜਿਹੜੇ ਸੱਚ ਸੇਵਦੇ ਨੇ ਸੇਵ ਜਿਹੜੇ ਸੱਚ ਸੇਵ ਦੇ ਹੀ ਰਹਿੰਦੇ ਨੇ। ਉਹ ਸੱਚ ਵਿਚੇ ਰਲਾ ਲੈਂਦਾ ਰੂ ਰੂ ਤੇ ਇਹ ਵਿਚੇ ਰਲਾ ਕੇ ਸਮੁੰਦਰ ਚ ਲੈ ਜਾਂਦਾ ਉਹਨੂੰ ਪਾਜਾ ਦਰਿਆ ਦਰਿਆal ਸਮੁੰਦਰ ਦੇ ਉੱਤੇ ਠੀਕ ਹੈ ਦਰਿਆ ਸਮੁੰਦਰ ਨਾਲ ਜੁੜਿਆ ਹੋਇਆ ਸਮੁੰਦਰ ਵੱਲ ਨੂੰ ਜਾ ਰਿਹਾ ਇਹ ਠੀਕ ਹੈ ਪਰ ਜੇ ਬੱਚੀ ਹੋਵੇ ਕੋਈ ਸਮੁੰਦਰ ਦੀ ਪਾਣੀ ਪਾਣੀ ਜੀ ਬਾਹਰ ਆ ਸਕਦੀ ਹੈ ਦਰਿਆ ਦੇ ਵਿੱਚ ਤਾਂ ਆ ਸਕਦੀ ਹੈ ਦਰਿਆ ਦੀ ਬੱਚੀ ਪਾਣੀ ਜੀ ਸਮੁੰਦਰ ਜਾ ਸਕਦੀ ਹੈ ਜੁੜੇ ਹੋਏ ਨੇ ਪਰ ਜੁੜਿਆ ਹੋਇਆ ਦੋਨੋਂ ਦਾ ਇਸ ਦਾ ਇੱਕ ਦੋ ਵੀਦ ਕਿਉਂਕਿ ਦਰਿਆ ਸਬੂਤਰ ਵੱਲੋਂ ਜਾ ਰਿਹਾ ਹੈ ਜਿੱਥਾ ਜਰ ਜਾ ਰਿਹਾ ਉਹ ਜਿੱਥੇ ਜਾ ਕੇ ਦੇਖੋਗੇ ਫਿਰ ਤੇ ਉੱਥੇ ਸਮੁੰਦਰ ਹੈ ਕੇ ਇਹਨਾਂ ਜਾ ਆ ਲੱਗਿਆ ਰਲਦੇ ਆ ਰਲ ਗਿਆ ਵਿੱਚ ਹੀ ਮਿਲ ਗਿਆ ਉੱਥੇ ਚਾਹੇ ਉਹਨੂੰ ਸਮੁੰਦਰ ਕਹੋ ਜਿੱਤੇ ਪੌਲੀਟਿਕ ਦਰਿਆ ਦਾ ਚਾਹੇ ਉਹਨੂੰ ਦਰਿਆ ਕਹੋ ਠੀਕ ਹੈ ਸੱਚ ਸੱਚੇ ਨੂੰ ਸ਼ਾਬਾਸ਼ ਹੈ ਸਤ ਸੱਚਾ ਸੇਵ ਫਲਦਿਆ ਤੇ ਕਾ ਸੱਚ ਨੂੰ ਦਾ ਸ਼ਾਬਾਸ਼ ਨਹੀਂ ਹੈ ਚੱਕੇ ਨੂੰ ਸ਼ਾਬਾਸ਼ ਹੈ ਸੱਚੇ ਸੱਚੇ ਨੂੰ ਸ਼ਾਬਾਸ਼ ਦਿੱਤਾ ਆਪ ਤੋਂ ਵੱਡਾ ਹੈ ਸੱਚ ਸਭ ਤਾਂ ਅਗਰ ਗੁਰ ਸ਼ਾਬਾਸ਼ ਸੱਚੇ ਨੂੰ ਸੱਚ ਦੇ ਘਰੋਂ ਮਿਲਦੀ ਹੈ ਸੱਚ ਦਾ ਵੱਡਾ ਹੈ ਉਹਦਾ ਤਾਂ ਉਹਦਾ ਮੁਕਾਬਲਾ ਸੱਚਾ ਉਹ ਸੱਚ ਨੇ ਸ਼ਾਬਾਸ਼ ਦਿੱਤੀ ਹੈ ਜਿਹੜੀ ਇਹਦੇ ਚਾਹੀ ਹੋਈ ਹੈ ਜਿਹੜੀ ਸ਼ਾਬਾਸ਼ ਬੁਰੀਆ ਦਰਗਾਹ ਨੂੰ ਮਿਲਿਆ ਕਨਲਾ ਮਦਦ ਸੱਚ ਜਿਹੜਾ ਸੱਚਾ ਹੈ ਨਾ ਜਿਹਦੇ ਸੱਚੇ ਦੇ ਉਹਨਾਂ ਨੂੰ ਸ਼ਾਬਾਸ਼ ਉਹ ਦਿੰਦਾ ਜਿਹੜਾ ਇਹਨਾਂ ਨੂੰ ਬੜਾ ਹੈ ਜਿਵੇਂ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਨੇ ਟੀਚਰ ਦਿੰਦੇ ਨੇ ਫਿਰ ਬਾਪੇ ਦੇ ਪੜ੍ਹੇ ਦਾ ਸ਼ਾਬਾਸ਼ ਹਾਂਜੀ ਵੱਡਾ ਹੈ ਸ਼ਾਬਾਸ਼ ਸੱਚੇ ਨੂੰ ਸੱਚ ਸਵਾਦ ਦੇ ਸਕਦਾ ਉਹ ਵੱਡਾ ਹੈ ਦੇਖੋ ਸੇਕਟਰ ਦਾ ਆ ਨਾ ਗੁਰੂ ਤੋਂ ਕੁਰਬਾਨ ਜਾਂਦਾ ਕੋਬ ਕੋਬ ਜਾਨ ਠੀਕ ਹੈ ਗੁਰੂ ਸਤਗੁਰੂ ਤੋਂ ਕੁਰਬਾਨ ਜਾਂਦਾ ਗੁਰੂ ਨਹੀਂ ਕਹਿੰਦੇ ਆਪਾਂ ਲੇਖਾ ਪੈਂਦਾ ਹੈ ਗੱਲ ਮੂਚੜੀ ਹੋ ਗਈ ਹੈ ਸਾਡੇ ਸਤਗੁਰੂ ਤੋਂ ਕੁਰਬਾਨ ਜਾਂਦਾ ਕੋਬ ਕੋਬ ਜਾਈ ਸਤਿਗੁਰ ਦੀ ਗਾਨ ਸਤਿਗੁਰ ਕਾਹੇ ਜੀਣਾ ਨੂੰ ਭੁੱਖਾ ਸਿਕਾ ਨੂੰ ਬਨਾਦੀ ਮੈਂ ਹੋਰ ਤੋ ਕੁਰਬਾਨ ਜਾਂਦਾ ਜਿਹੜੇ ਨਾਮ ਦੀ ਮੇਰੀ ਗੱਲ ਸੁਣ ਦੀ ਇੱਛਾ ਜਿਹਨਾਂ ਦੇ ਅੰਦਰ ਮੈਂ ਉਹ ਤੋ ਕੁਰਬਾਨ ਕਰ ਦੋ ਹਾਂਜੀ ਸੱਚ ਸੱਚਾ ਸੇਵ ਫਲਾਦਿਆ ਸੱਚ ਸੱਚ ਸੇਵ ਉਹ ਦੋਏ ਸੇਵ ਉੱਤੇ ਆ ਕੇ ਅਸੀਂ ਜਿਹੜਾ ਸਤਿਆਰੇ ਨੇ ਉਹ ਦੂਹ ਦੇ ਨਾਲ ਜੁੜੇ ਹੋਏ ਸੱਚਾ ਦੇਖੋ ਸੱਚ ਕੌਣ ਹੈ ਜਿਵੇਂ ਜਦ ਗੁਰਬਾਣੀ ਚ ਲਿਖਿਆ ਹੈ ਜਿਹੜੇ ਤੇਰੇ ਸੇਵਕ ਦੇ ਵਿੱਚ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ ਸੇਵਕ ਤੇਰੇ ਸੇਵਕਾਂ ਦਾ ਸੇਵਕ ਉਹ ਸੱਚੇ ਨੇ ਜਦ ਅਸੀਂ ਬੁਲਨਾਨਦ ਗੁਰੂ ਕਹਿੰਦੇ ਆ ਨਾ ਬੁਲਨਾਨਦ ਸੱਚ ਨਹੀਂ ਅਸੀਂ ਕਹਿ ਸਕਦੇ ਭਗਤ ਨੂੰ ਸੱਚ ਨਹੀਂ ਕਹਿ ਸਕਦੇ ਸੱਚ ਹੈ ਉਹ ਪਰ ਸੱਚਾ ਫਿਰ ਕੌਣ ਹੈ ਸੱਚਾ ਸੌਰੇ ਨਾਲ ਤੇ ਨਾ ਜੰਨਾ ਸੱਚਾ ਹੁੰਦਾ ਹੈ ਉਹਨਾਂ ਸੱਚ ਹੈ ਸੱਚ ਹੈ ਦਾ ਇਹ ਇੱਕ ਲਖਦਾਇਆ ਹੋਇਆ ਇਹਨਾਂ ਦਾ ਵਿਰਾਟ ਰੂਪ ਜਿਵੇਂ ਸਮੁੰਦਰ ਵਰਾਟ ਰੂਪ ਹੈ ਨਾ ਇਹ ਕਹਿੰਦੇ ਉਹ ਤਾਂ ਹੈ ਸਾਦਰ ਬੂਤਾਂ ਦੇ ਸਬੂਤਾਂ ਨੂੰ ਸੱਚ ਹੈ ਜਿਵੇਂ ਸਬੂਤਾਂ ਦੇ ਸਬੂਤਾਂ ਨੂੰ ਸਾਰੀਆਂ ਬੂਤਾਂ ਇੱਕ ਤੋਂ ਨੇ ਵਿਰਾਟ ਰੂਪ ਹੋ ਗਿਆ ਰੋਸੋ ਵਿੱਚ ਵੀ ਵਿਰਾਟ ਰੂਪ ਤਾਂ ਹੀ ਹੈ ਵਿਰਸ਼ ਵਿੱਚੋਂ ਦੇ ਕਾਂਹੀ ਉਹ ਬੀਜ ਪੈਦਾ ਉਹਦੇ ਵਿੱਚ ਸਮਾਏ ਹੋਏ ਨੇ ਜਿਹੜੇ ਬੀਜ ਤੋਂ ਵਿਰਸ਼ ਵੱਢੇ ਸਾਦਰ ਮੈਂ ਬੂਤ ਬੂਤ ਵਾਂ ਸਾਦਰ ਉਤਪੁੱਤਰ ਉਹ ਦੋਵੇਂ ਉਤਪੁੱਤਰ ਬੂਤ ਬੂਤ ਕੀ ਹੈ ਸਾਦਰ ਨੂੰ ਇੱਕ ਇੱਕ ਬੂਤ ਦੱਸਦੀ ਹੈ ਉਹ ਬੂਤ ਬੂਤ ਜੂਗਾ ਬਹੁਤਾਂ ਦੇ ਸਮੂਹ ਦਾ ਨਾਮ ਸਾਗਰ ਐ ਸੱਚ ਸੱਚ ਜਿਹੜਾ ਸਾਗਰ ਹੈ ਸੁਖ ਸਾਗਰ ਹੈ ਠੀਕ ਹੈ ਜਿਹੜਾ ਸੱਚਾ ਹੈ ਉਹ ਬੂਤ ਠੀਕ ਹੈ ਬੂਤਾਂ ਸਾਗਰ ਨਹੀਂ ਅਸੀਂ ਕਹਿ ਸਕਦੇ ਇੱਥੋਂ ਬਸ ਹੋ ਲਾਈਟ ਬੂਤ ਨੂੰ ਸਾਗਰ ਕਹਿੰਦੇ ਡੇਰ ਹੋ ਜਾਂਦਾ ਸਾਡੇ ਕੋਲ ਸਾਗਰ ਜਿਸਮਾਇਆ ਜਾ ਸਕਦਾ ਬੂਤ ਵਿੱਚ ਨਹੀਂ ਸਮਾਇਆ ਦਰਿਆ ਬੂਤ ਵਿੱਚ ਨਹੀਂ ਸਮਾਇਆ ਸਕਦਾ ਦੂਰ ਰਿਆਜ ਆਉਂਦੀ ਹੈ ਰਿਆ ਸਾਗਰ ਜਹੂਦ